ਸ਼ਲੋਕ ਮਹੱਲਾ ਚੌਥਾ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦੇ ਆਂ ਅੰਧਨ ਗੁਜਰੈ ਸ਼ਬਦ ਨਾ ਕਰੇ ਵਿਚਾਰ ਮਨਮੁਖ ਭੁੱਲੋਂ ਭੋਲਿਆ ਮਨਮੁਖ ਦਾ ਬੋਦੋ ਹੀ ਬੋਲਿਆ ਹੈ ਤੇ ਲੋਭ ਅਹੰਕਾਰ ਤਾਂ ਲੱਭ ਲੋਭ ਅਹੰਕਾਰ ਕਿੱਥੇ ਇਸ ਕਰਕੇ ਪਹਿਲੇ ਕਾਲੇ ਸਟੇਪ ਤੋਂ ਹੀ ਭੁੱਲ ਗਿਆ ਉਲਟੇ ਰਾ ਫੈਲਿਆ ਪਹਿਲਾਂ ਹੀ ਪਹਿਲੀ ਉਹ ਉਲਟੇ ਪਾਸੇ ਲੈ ਗਿਆ ਕੀ ਕੀ ਮਨੋ ਕੋ ਨੇ ਅਵਚਲ ਅਭ ਲੋਭ ਹੰਕਾਰ ਝਗੜਾ ਕਰਦੇ ਆਂ ਸ਼ਬਦ ਨਾ ਕਰਦੇ ਆਂ ਝਗੜਾ ਤਾਂ ਕਰਤਾ ਸ਼ਬਦ ਦੀ ਵਿਚਾਰ ਨਹੀਂ ਕਰਦਾ ਜੇ ਵਿਚਾਰ ਕਰੇ ਦੇਖੋ ਗੁਰਬਾਨੀ ਦੀ ਜੇ ਵਿਚਾਰ ਵੀ ਕਰਦੇ ਚੁੱਕੇ ਬੜੇ ਪੈਦਾ ਹੁੰਦੇ ਜੇ ਵਿਚਾਰ ਨਾ ਕਰੀਏ ਤੇ ਛੱਪ ਕੇ ਜੀ ਵਿਚਾਰ ਕਰਦੇ ਆਲਾ ਪਾਸਾ ਛੱਟਾ ਚੁੱਕਿਆ ਉਹਦੇ ਢੇਰ ਲੱਗੇ ਵਿਚਾਰ ਕਰਦੇ ਵੀ ਉਹ ਉਹਦੇ ਵਿੱਚ ਜੱਖ ਮਰ ਕੇ ਫਿਰ ਜਾਂਦੇ ਮੇਰੇ ਬਦਵਾ ਗੁਰਮੁਖ ਗੁਰਮੁਖ ਸੀਗੇ ਗੁਰਮੁਖੀ ਭਾਸ਼ਾ ਹੈ ਗੁਰਮੁਖੀ ਖੇਡ ਹੈ ਪਰ ਜਦੋਂ ਮਤਲਬ ਆਇਆ ਬੈਲ ਬੈਠ ਕੇ ਵਿਚਾਰ ਕਰਦੀ ਹਮ ਤੇ ਦੂਰ ਹੋ ਜਾਂਦਾ ਹੈ ਜਦੋਂ ਦੂਰ ਹੋਣ ਨੂੰ ਨਹੀਂ ਚਾਹਤਾ ਦਿੰਦਾ ਜਿਹੜਾ ਹੰਕਾਰ ਹੈ ਬਿਦ ਦਾ ਕੱਠੇ ਬੈਠਾ ਨਹੀਂ ਦਿੰਦਾ ਹੂੰ ਠੀਕ ਹੈ शुद्ध मत करते सब हिरलै बोलण सब विकार दितै केते ना संतोषीएं अंतर तृष्णा बहुत अज्ञान अंधियार और देख के, के आ पढ़ लन से तुमती हो अकल ना आ जांदी शुद्ध मत करते हिरलै ओ जेडी शुद्ध मत सी विद्वानاں ਜੇ ਸੀਗੀ ਤਾਂ ਹਿੱਲੇ ਤੋਕਕਾਰ ਹੋ ਗਿਆ ਰਬ ਹੋ ਗਿਆ ਲੋਭ ਹੋ ਗਿਆ ਇੰਨਾਂ ਦੀ ਹਾਜੀ ਸ਼ੁੱਧ ਮੱਤ ਹੀ ਜੰਦੀ ਹੈ ਤੇ ਦੇ ਤਿਆਗ ਤੋਂ ਸ਼ੁੱਧ ਮੱਤ ਹਾਜਰ ਹੁੰਦੀ ਹੈ ਇਸ ਗੱਲ ਦਾ ਧਿਆਨ ਰੱਖਦੇ ਦੀ ਲੋੜ ਹੈ ਸ਼ੁੱਧ ਮੱਤ ਜੇ ਹਿੱਲੀ ਹੋ ਗਿਆ ਕਦੇ ਇਕੱਠੇ ਨਹੀਂ ਬੈਠ ਸਕਦੇ ਕਦੇ ਇਕੱਠਾ ਦੀ ਕੋਈ ਕਰ ਸਕਦਾ ਜੇ ਤੱਕੇ ਹੋ ਨੂੰ ਕਹੇ ਤਾਂ ਇੱਕ ਦੂਏ ਕਈ ਹੋਰ ਗੱਲ ਨੂੰ ਕੁਝ ਸਾਹਮਣੇ ਭਲੀ ਕਹੀ ਬੁਰੀ ਲਗੀ ਪਣੀ ਕਹੀ ਹੋਰ ਗੱਲ ਹੈ ਹੈ ਜੀ ਸ਼ੁੱਧ ਮਤ ਕਰਤੇ ਸਭ ਹਿੱਲ ਲਈ ਬੋਲਣ ਸਭ ਵਿਕਾਰ ਤਿੱਤੇ ਕਿਤੇ ਨਾ ਸੰਤੋਖੀ ਅੰਤਰ ਬਹੁ ਅ ਗਿਆਨ ਅੰਧਿਆਰ ਸ਼ੁੱਧ ਦਾ ਇਹ ਹੀ ਹੋ ਗਿਆ ਜਿੱਥੇ ਬੋਲਦੇ ਨੇ ਕਿ ਕੀ ਅੰਤਰ ਤ੍ਰਿਸ਼ਨਾ ਦੀ ਗੱਲ ਜਿਹੜੀ ਆਂ ਜੀ ਬੋਲਦੇ ਨੇ ਹੰਕਾਰ ਹੈ ਅਗਿਆਨ ਹੰਕਾਰ ਆਪ ਤ੍ਰਿਸ਼ਨਾ ਦੇ ਵਿੱਚ ਅਗਿਆਨ ਅਧਿਆਰ ਹੈ ਅਗਿਆਨ ਤੇ ਅੰਧਕਾਰ ਦੀ ਬੋਲਦੇ ਨੇ ਤ੍ਰਿਸ਼ਨਾ ਵਿੱਚ ਬੋਲਦੇ ਨੇ ਹੰਕਾਰ ਵਿੱਚ ਬੋਲਦੇ ਨੇ ਤੇ ਫਿਰ ਉਹਤੇ ਇਕੱਠੇ ਕੌਣ ਹੁਰਦੂ ਤੁਹਾਡੀ ਸ਼ਬਦ ਵਿਚਾਰ ਕਿਵੇਂ ਕਰੋਗੇ ਐਨਾ ਬਕਾਲਾਂ ਦੇ ਕਿਵੇਂ ਤਾਂ ਤੁਸੀਂ ਇਕੱਠੇ ਬਹਿ ਜਾਓਗੇ ਕਿਮੇ ਤੁਸੀਂ ਸ਼ਬਦ ਵਿਚਾਰ ਕਰ ਲੋਗੇ। ਤੇ ਕਦੇ ਜਿਹੜਾ ਸਿੱਖਾਂ ਦੇ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਗਾਣ ਕਨੇ ਦੱਸਾਇਆ ਤਾਂ ਉਸ ਵੇਲੇ ਵੀ ਸੀਗੇ। ਉਸ ਵੇਲੇ ਦੀ ਗੱਲ ਐ। ਅਰੇ ਭਲੀ। ਐਸੇ ਮਨਮੁੱਖਾਂ ਨਾਲੋਂ ਜਿਨਾਂ ਦਾ ਆਇਆ ਬਹੁ ਪਿਆਰ ਇਹਨਾਂ ਦਾ ਬਹੁਤਿਆਰ ਪਿਆਰ ਹੈ ਉਹਨਾਂ ਬਰ ਬਕੋਨਾ ਸੁੱਤੀ ਕੋਲੀ ਕੱਲ੍ਹੇ ਹੀ ਜਦੇ ਹੋ ਭਾਈ ਉਹਨਾਂ ਨਾਲ ਵਖਰੀ ਜਗੇ ਮਹੱਲਾ ਦੂਜਾ ਭਾਉ ਹੈ ਤਿਨਾਂ ਗੁਰਮੁਖੀ ਪ੍ਰੀਤ ਨਾ ਹੋਏ ਉਹ ਆਵੇ ਜਾਏ ਭਵਾਈਆਂ ਸੁਪਨੇ ਸੁਖ ਨਾ ਕੋਈ ਕੋ ਗੁਰਮੁਖੀ ਪ੍ਰੀਤ ਅਸਲੀ ਪ੍ਰੀਤ ਹੁੰਦੀ ਅਜੇ ਪਰ ਜਿਹਨਾਂ ਦੇ ਅੰਦਰ ਦੂਜੀ ਭੁੱਖ ਹੈ ਉਹ ਬਾਹਰਲਖ ਕੋ ਖੋਧੀਆ ਕਿਹ ਬਾਹਰਲਖ ਪ੍ਰੇਮ ਹੁੰਦਾ ਹੈ ਦੂਜੀ ਭੁੱਖ ਹੈ ਜਿਹਨਾਂ ਦੇ ਅੰਦਰ ਦੂਜਾ ਮਾਇਆ ਦਾ ਦੋ ਚੀਜ਼ਾਂ ਦੇ ਹਾਂਜੀ ਬਾਹਰਲਾ ਸ਼ਰੀਰ ਹੈ ਅੰਦਰਲਾ ਸ਼ਰੀਰ ਇਹਨਾਂ ਦੇ ਅੰਦਰ ਬਾਹਰਲੇ ਸ਼ਰੀਰ ਦਾ ਪ੍ਰੇਮ ਹੈ ਨਾ ਹਾਂਜੀ ਬਾਲਕੀਰ ਜੋ ਜਿਹੜੇ ਜੁੜੇ ਹੋਏ ਨੇ ਬਾਲਕੀਰ ਦੀਆਂ ਲੋੜਾਂ ਜਿੱਦੋਂ ਦੀ ਪਹਿਲ ਦੇ ਅਧਾਰ ਤੇ ਰੱਖੀ ਹੋਈ ਏ ਉਹਦੇ ਹਾਂਜੀ ਉਹਦਾ ਪਾਉ ਵੀ ਪਹਿ ਬਾਲਕੀਰ ਨਾਲ ਪਹਿਲਾਂ ਅੰਦਰਲੇ ਨਾਲ ਦੂਏ ਨੂੰ ਠੀਕ ਹੈ ਜੀ ਦੇ ਅੰਦਰ ਦੂਜਾ ਪਾਉ ਹੈ ਨਾ ਪਹਿਲਾ ਬਾਹਲਾ ਪਾਉ ਹੈ ਮਾਇਆ ਦਾ ਪਾਉ ਹੈ ਪ੍ਰੀਤ ਵੀ ਉਹਨਾਂ ਦੇ ਅਦਰ ਗੁਰਮੁਖੀ ਪ੍ਰੀਤ ਹੀ ਹੋ ਸਕਦੀ ਪ੍ਰੀਤ ਹੋ ਸਕਦੀ ਪ੍ਰੀਤ ਕੱਤੀ ਆ ਪ੍ਰੀਤ ਐ ਝੂਠੀ ਦੇਖੀ ਪ੍ਰੀਤ ਜਗਤ ਸਭ ਜਿਉਂ ਮੇ ਪਾਛਾ ਗੈਣਾ ਪ੍ਰੀਤ ਦੇ ਲਫ਼ਜ਼ ਆ ਕਹਨੇ ਝੂਠੀ ਦੇਖੀ ਪ੍ਰੀਤ ਜਗਤ ਸਭ ਮੈਂ ਝੂਠੀ ਪ੍ਰੀਤ ਐ ਭਾਈ ਸੱਚੀ ਪ੍ਰੀਤ ਸੱਚੀ ਪ੍ਰੀਤ ਇਹ ਪਹਿਲੇ ਨੰਬਰ ਤੇ ਪ੍ਰੀਤ ਦੂਜੇ ਨੰਬਰ ਤੇ ਹੋ ਦੂਜੇ ਨੰਬਰ ਤੇ ਬਣੀ ਉਹ ਉਹ ਤਾਂ ਭਾੜੇ ਚ ਹੈ ਜੋ ਗਲੂ ਉਹਦੇ ਨਾਲ ਕੀ ਹੋਇਆ ਠੀਕ ਹੈ ਐਤੋਂ ਬਰਤ ਭਾਗਾ ਐਤੋਂ ਬਰਤ ਭਾਗਾ ਇਹ ਪ੍ਰੀਤ ਆ ਕੇ ਪਹਿਲੇ ਨੰਬਰ ਤੇ ਲਿਆਉਣੀ ਇਹ ਦੂਜੀ ਦੀ ਚਿੰਤਾ ਕੋਈ ਨਹੀਂ ਕਰਨ ਚਿੰਤਾ ਮਤ ਕਰੋ ਚਿੰਤਾ ਕੀ ਹੈ ਫੇਟ ਹੋ ਜੂ ਓਹ ਆਵੇ ਜਾਏ ਪਵਾਇਆ ਸੁਪਨੇ ਸੁਖ ਨਾ ਕੋਈ ਓਹ ਆਵੇ ਜਾਏ ਪਵਾਇਆ ਹਉਂਦੇ ਜਨ ਤੇ ਜਬਦੇ ਰਹਿੰਦੇ ਕੋ ਬਣ ਘਰੀ ਦੇ ਚੱਕਰ ਕਿ ਜਨ ਬਰਦੇ ਚ ਠੀਕ ਹੈ ਚ ਵੀ ਸੁਖਤੀ ਹੋ ਸਕਦਾ ਸੁਪਨਾ ਵੀ ਜੁਨਾਨ ਨੂੰ ਇਹ ਜਾਈ ਆਉਗਾ ਜਮਦੂ ਦੇ ਹਾਂਜੀ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਏ ਕੂੜ ਬਣਾ ਕੇ ਪੂਰੇ ਸੋਚ ਲੈਣਾ ਜੋ ਸੋਚ ਲੈਣਾ ਵੀ ਕੂੜ ਹੈ ਜੋ ਵਿਚਾਰ ਦੇ ਵੀ ਕੂੜ ਹੈ ਜੋ ਉਚਾਰ ਦੇ ਵੀ ਕੂੜ ਹੈ ਸੋਚ ਨੇ ਕੂੜ ਵਿਚਾਰ ਦੇ ਵੀ ਕੂੜ ਹੈ ਉਚਾਰ ਦੇ ਕੂੜ ਹੈ ਕੋਟੂਗਾ ਵਿਚਾਰੂਗਾ ਉਹ ਹੀ ਚਾਰਨ ਕਰੂਗਾ ਠੀਕ ਹੈ ਸਭ ਝੂਠ ਹੈ ਲੱਗਿਆ ਕੋੜ ਹੋਏ ਕਿਉਂਕਿ ਕੋੜ ਨਾਲ ਜੁੜੇ ਹੋਏ ਨੇ ਲੋਹੋ ਕੋੜ ਨਾਲ ਜੁੜੇ ਹੋਏ ਨਾਲ ਮਾਇਆ ਦਾ ਮੋਹ ਸਾਰਾ ਦੁੱਖ ਹੈ ਮਾਇਆ ਦੇ ਗੁਣ ਜਲੇ ਤੈਨੂੰ ਦੁੱਖ ਦੁੱਖ ਹੈ ਉਹਨਾਂ ਦੇ ਦੁੱਖਾਂ ਦੇ ਵਿੱਚ ਹੀ ਬਰਸਦੀ ਜਿੰਦਗੀ ਨਹੀਂ ਜਾਂਦੀ ਆ ਰੋਦਿਆਂ ਦੀਓ ਦੁਕਾਨੇ ਬਿਕੇ ਨਹੀਂ ਜਾਂਦੀ ਏ ਜ਼ਿੰਦਗੀ ਸਾਰੀ ਰੋਧਿਆਂ ਦੀ ਜਾਣ ਕਰਤਾਤ ਲੈਵੇ ਜੋੜ ਆਵੇ ਜੇ ਲੋਚੇ ਸਭ ਕੋਈ ਦੋ ਤਰੀਕੇ ਨੇ ਲੈ ਵਤਾਤ ਰਾਹ ਹੈ ਕੋ ਰਾਸ ਲੈ ਵਦਾ ਲੱਗ ਜਾਣਾ ਜਾਂ ਬੋਲਦਾ ਝਟਕਦੇ ਰਹਿਣ ਇਹ ਦੋ ਆਰਥਿਕ ਜਗਾ ਲਈ ਕੀਤਾ ਜਾ ਸਕਦਾ ਤੇ ਕਿਹਾ ਆ ਆਪਾਂ ਛੇਤੀ ਛੱਕਦਾ ਭਾਈ ਦਾ ਛੱਕਦੀ ਸਕਦਾ ਤਾਂ ਅੱਜ ਦਾ ਮਤਲਬ ਧੌਣਾ ਪੱਜਣ ਰੱਖਣ ਜੁੱਦੋ ਫਸਵਾ ਇਹਨਾਂ ਦਾ ਤਾਂ ਜੋਰ ਦੇ ਨਹੀਂ ਜਿਹਦੇ ਦਾ ਦੋ ਰਸਤੇ ਜਿੰਨਾ ਵੱਡੀ ਨਹੀਂ ਬਿੱਲੇ ਵਾਲ ਧਾਤ ਵਿੱਚੇ ਸਾਧੂ ਬਿੱਲੇ ਦੀ ਬਣਦਾ ਲੇਵਲਾ ਰਸਤਾ ਪਰ ਉਹਨਾਂ ਬੁੱਤਾਂ ਦਾ ਰਸਤਾ ਨਾ ਹੋਊ ਮਨ ਨੂੰ ਦਿਖਾਉਣਾ ਪਊਗਾ ਤਾਂ ਪ੍ਰਾਪਤੀ ਹੈ ਬੁੱਧ ਦੇ ਕਿਸੇ ਵੀ ਪ੍ਰਾਪਤੀ ਨਹੀਂ ਠੀਕ ਹੈ ਹੈ 레ਵਲਾ ਕੀ ਹੈ ਪੁੰਨ ਪਾਇਆ ਕਿੰਨਾ ਗੁਰ ਸ਼ਬਦੀ ਸੁਖ ਹੋਈ ਜਿਨਾਂ ਦੇ ਪੋਤੇ ਪੋਣ ਪਾਇਆ ਜਿਨਾਂ ਦੇ ਪੋਤੇ ਪੋਤ ਪਾਇ ਜਿਨਾਂ ਦੇ ਨੇ ਉਹ ਪੋਚਾ ਫੇਰਦੇ ਪੋਚਾ ਫੇਰਦੇ ਆ ਗੱਲ ਦਾ ਪੋਚਾ ਫੇਰਦੇ ਆ ਕਿਸੇ ਨੂੰ ਕੋਈ ਐਸੇ ਕਹਿ ਦਿੰਦੇ ਦਾ ਪੋਚਾ ਹੁੰਦਾ ਠੀਕ ਪੋਚੇ ਤਾਂ ਪੁੱਨ ਯਾਰ ਬੰਦੇ ਸੱਚ ਦਾ ਇਕ ਮਨ ਦਾ ਪੋਟਿਆ ਕਾਲਾ ਉਹ ਉੱਤੇ ਦੀ ਕਾਲਾ ਪੋਟਿਆ ਫੇਰਦੇ ਨੇ ਜਿਹਦੇ ਪੋਟੇ ਕੋਲ ਪਾਇਆ ਪਰ ਬਹੁਤ ਸਮੇਂ ਜਿਹਨਾਂ ਨੂੰ ਉਹ ਕੋਤੂ ਦੱਤਾਇਆ ਚਿੱਟਾ ਚੜਦਾ ਉਹ ਤੇ ਠੀਕ ਹੈ ਉਹਨਾਂ ਦੇ ਐਸੇ ਬਚਨ ਦੇ ਉਹ ਤੋਂ ਸਿੱਖਿਆ ਮਿਲਦੀ ਹੈ ਗੁਰਮਤਿ ਸਿੱਖਿਆ ਮਿਲਦੀ ਹੈ ਤੇ ਨਾ ਗੁਰ ਸ਼ਬਦੀ ਸੁਖ ਹੋਈ ਗੁਰਾਂ ਨੂੰ ਗੁਰ ਸ਼ਬਦ ਦੇ ਨਾਲ ਗੁਰਪ੍ਰਦੇਸ਼ ਨਾਲ ਸੁਖ ਹੋਦਾ ਨੂੰ ਹੈ ਜੋ ਸੁਖ ਮਿਲਦਾ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰ ਸੰਤ ਮਨ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਅੱਜ ਸੰਤ ਮੁਰ ਕਾਲ ਦੇ ਜਿਹੜੇ ਸੰਤ ਮੁਰ ਜਨੋ ਜਿਹਨਾਂ ਨਾਲ ਬਸ ਗਿਆਨੀ ਹੈ। ਜਮਾਦਾਰਤ ਗਿਆਨੀ ਹੈ। ਅੱਛਾ ਜਿਹਨਾਂ ਨੂੰ ਕੁਝ ਗਿਆਨ ਹੈ। ਜੇ ਸੰਤ ਵੀ ਹੈ ਜਿਹਦੇ ਮਿਰੋ ਜਨਾਂ ਤੇ ਉਹਨੂੰ ਕੋਈ ਗਿਆਨ ਹੈ। ਉਦ ਵੀ ਹੈ ਜੇ ਤੁਹਾਨੂੰ ਮਨ ਨਹੀਂ ਲੱਗਿਆ ਗਿਆਨ ਨਹੀਂ ਹੈ ਜਿਹੜੇ ਮਨੌਰ ਜਨ ਜਨਨ ਆ ਲੱਗਿਆ ਉਦੋਂ ਤੁਹ ਸੋਝੀ ਹੈ ਗੁਰਮਤਿ ਠੀਕ ਹੈ ਹਾਂ ਬਾਣੀ ਦੇ ਵਿਚਾਰ ਇਹ ਸਤਬੂਦ ਚੜੋ ਚਾਰ ਵੇਦ ਚਾਰ ਵੇਦ ਚਾਰ ਵੇਦ ਉਹੀ ਗੱਲ ਕਹਿੰਦੇ ਨੇ ਜਿਹੜੇ ਉਹਨਾਂ ਨੇ ਸਤਬੂਦ ਜੀਰੋ ਨੇ ਵਿਚਾਰ ਕੇ ਕਹੀ ਹੈ ਉਹ ਚਾਰਵੇਂ ਦਮ ਚੋਹੀ ਲਿਖਿਆ ਹੋਇਆ ਜਿਹੜੇ ਗੁਰ ਜਨ ਵਿਚਾਰਵਾਦ ਸੀਗੇ ਇਹਦੇ ਬੁਨਿਆਦ ਜੋ ਵੀ ਆਇਆ ਨੇ ਜਨੋ ਠੀਕ ਹੈ ਭਗਤ ਮੁਖ ਹੈ ਤੇ ਬੋਲਦੇ ਇਸੇ ਵਚਨ ਹੋਵੰਦੇ ਭਾਜੇ ਭਗਤ ਬੋਲਦੇ ਨੇ ਮੁਖ ਤੇ ਉਹ ਤਾਂ ਹਰ ਦਾ ਗਿਆ ਵਕਤਾਂ ਨਾਲ ਸੁਣਾ ਰਹੇ ਤੇ ਉਹ ਪ੍ਰੈਜ਼ੈਂਟ ਵਿੱਚ ਬੋਲਦੇ ਨੇ ਤੁਸ ਅੱਛਾ ਜੀ ਭਾਵੇਂ ਨਾ ਪਾਸਟ ਵਿੱਚ ਬੋਲਦੇ ਨਾ ਫਿਊਚਰ ਵਿੱਚ ਬੋਲਦੇ ਹੋ ਬੰਦੇ ਹਰ ਦਾ ਗਿਆ ਵਕਤਾਂ ਨਾਲ ਕਾਖ ਸੁਣਨਾ ਵੈ ਬੋਲਦੇ ਨੇ ਭਗਤ ਠੀਕ ਨੇ ਵੀ ਪੇਟ ਅੱਛਾ ਜੀ ਸੱਚ ਦੇ ਵੀ ਹੋਊ ਤਾਂ ਨੇ ਝੂਠੀ ਦਸੀ ਗਏ ਥਿਊਰੀ ਦੱਸੀ ਹੈ ਹਾਂ ਉਹ ਥਿਊਰੀ ਦੱਸੀ ਹੈ ਪਰ ਭਗਤ ਜਿਹੜੇ ਬੋਲਦੇ ਨੇ ਉਹ ਬਚਨ ਹੋ ਰਹੇ ਨੇ ਆਲਰੇਡੀ ਉਹ ਵਰਤਲੇ ਆ ਵਰਤਾਰਾ ਭਗਤ ਜਿਹੜੇ ਕਹਿ ਰਹੇ ਨੇ ਭਗਤਾਂ ਦੀ ਅਸਤਾ ਉੱਚੀ ਹੈ ਪ੍ਰਗਟ ਪਹਾਰ ਜਾਪ ਦੇ ਸਭ ਲੋਕ ਸੁਣਨ ਦੇ ਉਹ ਪ੍ਰਗਟ ਪਹਾਰ ਹੈ ਉਹਦੇ ਸ਼ਬਦ ਗੁਰੂ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਭ ਕੁਝ ਠੀਕ ਨਾ ਜੋ ਹੋ ਰਿਹਾ ਸਭ ਲੋਕ ਸੁਣਉਂਦੇ ਸਾਰੇ ਲੋਕ ਸੁਣਦੇ ਨੇ ਉਹਨਾਂ ਦੀ ਗੱਲ ਨੂੰ ਉੱਥੇ ਜੋ ਕਹਿ ਰਹੇ ਨੇ ਹੋ ਰਿਹਾ ਸਤਿ ਸਕੀਰਿਆ ਬੁਲਾ ਰਿਹਾ ਜੋ ਕਰ ਰਿਹਾ ਉਹ ਤਾਂ ਬੁਲਾ ਰਿਹਾ ਬੁਲਾ ਰਿਹਾ ਹੋਈ ਹੋ ਰਿਹਾ ਲੋਕਾਂ ਨਾਲ ਹੋ ਰਿਹਾ ਸੁਖ ਨਾ ਪਾਇਨ ਮੁਗਧ ਨਾਰ ਸੰਤ ਨਾਲ ਖਾਂਦੇ ਇਹਨੇ ਮਗਰਾਂ ਅੰਦਰ ਨੂੰ ਸੁਖੀ ਬਿਲਦਾ ਸੱਤਾਂ ਨਾਲ ਸਿੱਦੇ ਨੇ ਕੋ ਮੋਬਰੋਦ ਸੁਵੇਗ ਦੇ ਜੇ ਨਾ ਰਾ ਉਹ ਆਮ ਸੁਖ ਪੂਰੇ ਕਰਦਾ ਠੀਕ ਮਿਲਿਆ ਨਾ ਖਾਣ ਨੂੰ ਮਿਲਦਾ ਇਹ ਤਿੰਨ ਲੋਕ ਦਾ ਸੱਚਾ ਸੱਤਾਂ ਨਾਲ ਖੈਣ ਵਾਲਿਆਂ ਨੂੰ ਗੁਰਮੁਖਾਂ ਨਾਲ ਖੈਣ ਵਾਲਿਆਂ ਨੂੰ ਰਾਜ ਦਾ ਸੁਖ ਮਿਲਿਆ ਨਾ ਬਲੂਕਾ ਠੀਕ ਹੈ ਜੀ ਉਹ ਲੋਚਨ ਉਹਨਾਂ ਗੁਣਾਂ ਨੂੰ ਉਹ ਇਹ ਅਹੰਕਾਰ ਛਡੰਦੇ ਉਹ ਲੋਚਨ ਉਹਨਾਂ ਗੁਣਾਂ ਨੂੰ ਲੋਝਦੇ ਹੋ ਵੀ ਨੇ ਉਹ ਵੇਖ ਜਿਹੜੇ ਖਾਣ ਵਾਲੇ ਨੇ ਉਹਨਾਂ ਗੁਣਾਂ ਨੂੰ ਉਹ ਵੀ ਲੋਝਦੇ ਨੇ ਵੀ ਸਾਡੇ ਕੋਲ ਵੀ ਇਹ ਗੁਣ ਆ ਜਾਣ ਠੀਕ ਹੈ ਉਹ ਗੁਣ ਦਾਦਾ ਪਤੰਦਰਾ ਤੁਸੀਂ ਵਿਰੋਧ ਕਰਦੇ ਹੋ ਉਹ ਉਹੀ ਗੁਣ ਨੇ ਸੰਤਾਂ ਕੋਲ ਜਿਨ੍ਹਾਂ ਦਾ ਵਿਰੋਧ ਕਰਦੇ ਹੋ ਤੁਹਾਡੇ ਕੋਲ ਹੁਣ ਤਾਂ ਜੇ ਤੁਸੀਂ ਵਿਰੋਧ ਨਾ ਲੋਟਣ ਠੀਕ ਹੈ ਉਹ ਲੋਚਣਵਾ ਦੇ ਪ੍ਰਿਆਸ ਤਾਲ ਖੜੰਦੇ ਛੱਡਦੇ ਹੰਤਾਰ ਜੇ ਛੱਡੇ ਜੁਣ ਕਿਉਂਦੀ ਉਹ ਕਿਉਂ ਨਹੀਂ ਤੁਸੀਂ ਧਾਰਨ ਕਰੋ ਜੀਵੇਂ ਹੋ ਕੇ ਨਾਲੇ ਦਾ ਗੁਣਾ ਦਾ ਵਿਰੋਧ ਕਰਦੇ ਹੋ ਨਾਲੇ ਕਹਿੰਦਾ ਸਾਡੇ ਕੋਲ ਕਿਉਂਦੀ ਕੋਈ ਵਿਚਾਰੇ ਕੀ ਕਰੇ ਜਾਂ ਭਾਗ ਟਰਮੰਦੇ ਉਹਨਾਂ ਦੇ ਭਾਗ ਦੇ ਬੁੱਢੇ ਟਰੰਗ ਪੁੱਠੀ ਬੁੱਢੀ ਹੋਈ ਹੋਇਆ ਉਹ ਬੁੱਧੀਆ ਪੁੱਠੀ ਹੋ ਗਈ ਲਾਸ਼ ਕਾਲ ਬੇਫਰੀਦ ਬੁੱਧੀ ਹੋ ਗਈ ਦੀ ਉਹ ਵਿਚਾਰੇ ਕਰਨ ਕੀ ਲੈ ਬੈਠੇ ਸੈਂਡ ਹਸਾਰ ਦਾ ਸੈਂਡ ਲੈ ਬੈਠੇ ਸਿੱਧੇ ਤੌਰ ਤੇ ਭੁੱਲ ਵੀ ਸਕਦੇ ਉਹਨਾਂ ਦੇ ਕਾਲ ਓਂਕਾਰ ਦੇ ਕੀ ਲੈਣਾ ਛੱਡ ਕੇ ਪਰੇ ਹੋ ਓਂਕਾਰ ਨੂੰ ਤੋੜ ਕੇ ਕਾਲ ਵਿੱਚ ਸੁਖ ਨਹੀਂ ਹੈ ਠੀਕ ਹੈ ਜੀ ਛੱਡ ਲਿਓ ਓਂਕਾਰ ਨੂੰ ਛੱਡਤੀਆ ਗਲਤੀ ਕੋਣ ਲਿਓ ਮੈਂ ਗਲਤੀ ਮੈਂ ਹੋ ਗਈ ਸੀ ਭਾਈ ਛੱਡਤੀ ਕੀ ਗੱਲ ਹੈ ਭਲਾ ਕੋਈ ਔਖਾ ਹੈ ਅੰਜਲੀ ਕੀ ਲਖਨੂ ਰਾਜਾ ਬੋ ਚੱਡੀ ਹੈ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਜਿਹੜੇ ਪਾਰ ਬ੍ਰਹਮੇ ਮਾਰਤੇ ਉਹ ਪੁੱਤਿਓ ਮਾਰ ਪੈ ਗਈ ਤੇ ਉਹ ਕਿਸੇ ਨੇ ਨਹੀਂ ਆਪਣੇ ਨਾਲ ਜੋੜੇ ਉਹ ਕਿਸੇ ਨੇ ਆਪਣੇ ਨਹੀਂ ਬਣਾਏ ਠੀਕ ਨੂੰ ਕੋਈ ਨਹੀਂ ਅਪਣਾਉਂਦਾ ਕੋਈ ਅਪਣਾ ਅਪਣਾਉਣਾ ਹੁੰਦਾ ਅੱਛਾ ਜੀ ਠੀਕ ਹੈ ਜੀ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੇ ਜਿਹੜਾ ਵੈਰ ਦਾ ਵੈਰ ਕਰੂਗਾ ਉਹਨਾਂ ਨੂੰ ਪੁੱਛੇ ਬੁਰਖਾ ਨੂੰ ਧਰਮ ਵੈਰ ਕੀ ਹੋਇਆ ਧਰਮ ਵੈਰ ਤੋਂ ਧਰਮ ਦਾ ਸ਼ਕਤੀ ਹੈ ਉਹ ਉਹ ਜਦੋਂ ਉਹਦੇ ਰਲੀਆਂ ਇਨਾਮ ਦਾ ਕੋਈ ਨਹੀਂ ਫਰਕ ਪੈਂਦਾ ਮੇਰੇ ਬਾਰੇ ਆਮ ਕੋਈ ਫਰਕ ਕੋਈ ਫਰਕ ਕੋਈ ਨੀਣਾ ਬਹਿਰ ਕਰਦੇ ਉਹਨਾਂ ਨੂੰ ਨਹੀਂ ਕੋਈ ਫਰਕ ਪੈਂਦਾ ਉਹਨਾਂ ਦੀ ਇੱਜ਼ਤੇ ਵੀ ਕੋਈ ਸਾਡੀ ਤਾਂ ਕੋਈ ਅਸੀਂ ਤਾਂ ਇੱਜ਼ਤ ਆਪਣੀ ਸਮਝ ਇੱਜ਼ਤ ਮੇਟੀ ਵਾਲਾ ਸਾਡੇ ਕੋਲ ਦਾ ਸਵਾਲ ਹੈ ਦੀ ਹੈ ਕਿਹਾ ਸਾ ਦਾ ਸਵਾਲ ਨਹੀਂ ਸਾਡਾ ਆਪ ਜਸ ਜਪਣਾ ਮਾਲ ਇਹ ਤੇ ਵੇਸ਼ੀ ਦੁਨੀਆ ਦੀ ਵੜਿਆਈ ਇਹਦਾ ਤਾਂ ਸਾਡੇ ਅੰਦਰ ਪੱਕਾ ਹੀ ਪਾੜਿਆ ਹੋਇਆ ਹਾਂਜੀ ਸਾਡੇ ਮੇਰੇ ਦਾ ਕੋਈ ਨਹੀਂ ਤੇ ਜਲਦੀ ਪਰਮੇਸ਼ਰ ਦਾ ਗਿਆਨ ਹੈ ਪਰਮੇਸ਼ਰ ਸਭ ਦਾ ਭਲਕਾ ਹੈ ਇਹਦਾ ਸਾਡਾ ਮੈਨੂੰ ਇੱਕ ਜਾਵ ਉਹ ਤਾਂ ਬਿਟ ਗਈ ਆਪਣੀ ਹਸੀ ਬਿਟਾ ਦਿੱਤੀ ਤੂੰ ਨਾਲ ਬੈਠ ਕੇ ਕੀ ਕਰੂੰਗਾ ਪਾਰਿਭ੍ਰਮ ਸੰਗਿਆਰ ਪਈ ਹੁੰਦਾ ਇਹ ਜਿਤਨੇ ਮੈਂ ਰਾਏ ਪਚੰਦੇ ਤਰੂ ਦਾ ਹੋਰ ਵੀ ਤੱਕ ਕੁਝ ਵੀ ਲਿਬੂ ਕੋਸਕੇ ਥੋੜਾ ਛਿਲਕਾ ਜਿਹਾ ਪਰੇ ਮਾਰੀ ਚੱਕੇ ਜੋ ਜੋ ਸੰਤ ਸ਼ਰ ਭਵੰਦੇ ਫੇਲ ਮੁਢਾਹੋਂ ਕਟਿਆ ਤਿਸ ਦਾਲ ਸੁਗੰਧ ਜਿਹੜੇ ਜਿਹੜੇ ਸਨ ਸ਼ਰਾਬਿਆ ਲਫਜ਼ੇ ਦੀਏਗਾ ਸੰਤਾਂ ਨੇ ਸ਼ਰਾਬ ਦਿੱਤਾ ਜੋ ਜੋ ਸੰਤ ਸਿਰ ਆਪਿਆ ਸੰਤਾਂ ਦੇ ਗੱਲ ਪੈ ਗਿਆ ਸੰਤਾਂ ਦਾ ਵਿਰੋਧੀ ਹੋ ਗਿਆ ਸੰਤ ਨੇ ਸ਼ਰਾਬ ਦੰਦੇ ਕਿਸ ਨੂੰ ਠੀਕ ਹੈ ਜੀ ਸ਼ਰਾਬ ਨੂੰ ਲੋੜ ਹੈ ਸ਼ਰਾਬ ਦਿੰਦੇ ਉਹ ਤਾਂ ਸ਼ਰਾਬ ਦੇ ਦੇਣਗੇ ਨਾਂਸ ਨਾਲ ਜੁਮਲੇ ਹੋ ਗਿਆ ਮਤਲਬ ਕਿ ਇਹੇ ਉਹ ਨੇ ਫਿਰ ਫਿਰੇ ਉਹ ਬੰਦੇ ਉਹ ਕਹਿੰਦੇ ਵਿਚਾਰੇ ਪਹੁੰਚੇ ਕਿੰਨੇ ਲੈ ਬੀਚੂ ਬੋਲ ਠੀਕ ਹੈ ਇਹ ਜਿਹੜਾ ਮੁੱਢ ਹੀ ਬੇਡ ਜਾਵੇ ਕਾਣੀ ਉਹਦੀ ਆਪੇ ਸੁੱਕ ਜਾਂਦੀ ਠੀਕ ਹੈ जड़ो पेट काट दिए डालियां पत्ते आपे सूख